ਆਪਣੇ ਗੁਰਮੁਖੀ ਕੈਦੇ ਦੇ ਆਪਾਂ ਅਖੀਰੀ ਅੱਖਰ ਤੇ ਆ ਗਏ ਆ ਜੀ 35ਵਾਂ ਅੱਖਰ ਜੋ ਆਪਾਂ ਗੁਰਮੁਖੀ ਲਿਖਦੇ ਆ ਉਹ ਜੀ ਡਾੜਾ ਅੱਖਰ ਹੈ ਇਹ ਡਾੜਾ ਅੱਖਰ ਆਪਣੇ ਕੋਲ ਜਿਹੜੀ ਆਪਦੀਆਂ ਸਾਊਥ ਦੀਆਂ ਭਾਸ਼ਾਵਾਂ ਮੈਂ ਉਹਦੇ ਚੋਂ ਆਇਆ ਹੈ ਹਾਂ ਭਗਤ ਕਬੀਰ ਜੀ ਦਾ ਕੋਈ ਉਪਦੇਸ਼ ਨਹੀਂ ਹੈ ਪਹਿਲੀ ਵਾਰ ਕਿਸੇ ਅੱਖਰ ਰਾੜੇ ਅੱਖਰ ਤੋਂ ਉਹਨਾਂ ਨੇ ਕੋਈ ਉਪਦੇਸ਼ ਨਹੀਂ ਦਿੱਤਾ ਜੀ ਹੋ ਗੁਰਨਾਨਕ ਸਾਹਿਬ ਦਾ ਉਪਦੇਸ਼ ਜੋ ਹੈ ਉਹ ਦੋ ਕਕਿਆ ਰਣਾਣੇ ਅੱਖਰ ਤੋਂ ਨਹੀਂ ਹੈ ਪਰ ਰਾੜੇ ਅੱਖਰ ਤੋਂ ਗੁਰਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਜੀ ਹਾਂ ਉਤੀ ਨੰਬਰ ਪੌੜੀ ਜੀ ਰਾੜ ਕਰੋ ਕਿਆ ਪ੍ਰਾਣੀ ਅਮਰ ਹੋਵਾਂ ਕਰਨਾ ਰਾਖ ਉਹਦਰ ਬੋਲਦੇ ਬੋਲਦੇ ਨੇ ਝਗੜਾ ਕਰਨਾ ਰਾੜ ਕਰੋ ਗਿਆ ਪ੍ਰਾਣੀ ਹੋਈ ਰਾੜ ਰਾੜ ਕਰੈ ਕਿਆ ਪ੍ਰਾਣੀ ਜੇ ਅਮਰ ਹੋਆ ਤਿਸੈ ਧਿਆਵੋ ਜੋ ਅਹਰ ਹੋਆ ਜੇਡਾ ਅਮਰ ਹੈ ਆਤਮਾ ਅਮਰ ਹੈ ਉਹੇ ਧਿਆਨ ਰੱਖੋ ਆਪ ਤੁਸੀਂ ਕਿਛੜਾਣਾ ਕਰੋ ਬੈਸ ਮੁਕਾਸਤਾ ਨਾ ਕਰੋ ਗੋਸ ਨਾ ਕਰੋ ਆ ਠੀਕ ਆ ਉਹ ਠੀਕ ਹੈ ਆਪਣੇ ਅੰਦਰ ਮੂਰ ਨਾਲ ਜੁੜੇ ਰਹੋ ਹੋਜੀ ਤੇ ਸੇ ਤੇ ਆਵੋਂ ਸੱਚ ਸਮਾਵੋਂ ਉਸ ਵਿੱਚੋਂ ਕੁਰਬਾਨ ਕੀਆ ਤੇ ਜੇ ਕਿ ਆਵੋਂ ਸੱਚ ਸਮਾਵੋਂ ਜੀ ਨੂੰ ਜਿਹਦੇ ਨਾਲ ਧਿਆਨ ਜੋੜ ਨਾਲ ਸੱਚ ਵਿੱਚ ਸਮਾਜੂ ਉਹ ਕੁਰਬਾਨ ਹੋ ਗਿਓ ਉਹ ਤਾਂ ਕੁਰਬਾਨ ਕਰ ਦਿੱਤਾ ਅਸੀਂ ਤਾਂ ਜੀ ਨੂੰ ਜਿਹੜਾ ਸੰਜੋੜ ਕੇ ਸੱਚ ਵਿੱਚ ਸਮਾਏ ਆਂ ਸੀ ਕੋਈ ਗੁਰਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈ ਤੇ ਗੌੜੀ ਮਹੱਲਾ ਪੰਜਵਾਂ 47ਵੀਂ ਪੌੜੀ ਦਾ ਉਪਦੇਸ਼ ਹੈ ਜੀ ਪੌੜੀ ਰਣਾੜਾ ਰਾੜ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਹਾਂਜੀ ਰਾੜਾ ਰਾੜ ਮਿਟੇ ਸੰਗ ਸਾਧੂ ਇਹਦਾ ਝਗੜਾ ਵਿਡ ਰਹਾ ਨਾ ਗਰੀਬੀ ਨਹੀਂ ਵਟਣਾ ਜਨਾ ਜਲਾ ਇੱਕ ਮਨਿਕ ਜਿਤਨੀ ਹੋ ਸਾਧੂ ਦੀ ਸੰਗਤ ਵਿੱਚ ਜਾ ਕੇ ਸਾਧੂ ਨਾਲ ਜੁੜ ਕੇ ਝਗੜਾ ਘਟਾਓ ਅੰਤਰਮੁਖੀ ਹੋ ਜਾਓ ਕਿਸੇ ਨਾਲ ਕੋਈ ਲੋੜ ਨਹੀਂ ਹੈ ਮੂਰਖ ਨਾਲ ਨਾਲ ਨਹੀਂ ਕੋਲ ਕਰੇ ਉਹ ਬੁਝੀ ਰਾੜ ਕਰਦੇ ਨੇ ਮੂਰਖ ਗੁਰਮੁਖੀ ਕਰਦੇ ਮੂਰਖ ਆਪਣੀ ਸਬਦ ਵਿਚਾਰ ਕਰਦੇ ਨੇ ਆਪਣੇ ਗੁਰ ਨਾਲ ਜੁੜੇ ਰਹਿੰਦੇ ਕਰਕੇ ਸਬਦ ਵਿਚਾਰ ਕਰੋ ਆਪਣੇ ਗੁਰ ਨਾਲ ਜੁੜੇ ਸਾਧੂ ਕਰਮ ਕਰਮ ਦਾ ਨਾਮ ਕਰਮ ਕਰਮ ਕਰੋ ਸਬਦ ਵਿਚਾਰ ਕਰੋ ਸਾਤਨਾਮ ਦੀ ਆराधना ਕਰੋ ਸਾਤਨਾਮ ਦੀ ਖੈਰ ਮੰਗੋ ਸਾਤਨਾਮ ਮੰਗੋ ਨਾਲੇ ਕੋ ਬੋਗੇ ਨਾ ਉਹ ਤਾਂ ਪ੍ਰਵਾਹ ਕਰੋ ਹਰੇ ਅਗਲਾ ਕੰਮ ਉਹ ਕਰਨਾ ਠੀਕ ਹੈ ਬੈਠ ਕਰਨਾ ਉਹ ਕਰਨਾ ਚੰਗੀ ਗੱਲ ਹੈ ਹੋ ਗਈ ਰੂੜੋ ਜੇ ਬਸਿਓ ਰਿਦਮਾਹੀ ਉਵਾ ਕੀ ੜਾੜ ਮਿਟਤ ਬਿਨ ਸਾਹੀ ਜਿਹੜਾ ਅੰਦਰ ਦੇਚ ਬਸਿਆ ਹੋਇਆ ਉਹ ਸੁੰਦਰ ਹੈ ਰੂੜੋ ਤਾਂ ਸੁੰਦਰ ਸਭ ਤੋਂ ਸੁੰਦਰ ਉਹ ਹੈ ਜਿਹੜਾ ਅੰਦਰ ਬਸਿਆ ਹੋਇਆ ਉਹਦੀ ਰਾੜ ਮਿਟੀ, ਇਹਦੀ ਰਾੜ ਬੰਦ ਸਿੱਕਈ ਖਤਮ ਹੋ ਗਈ ਉਹਦੇ ਵਾਸਤੇ ਝਗੜਾ ਕੋਈ ਚੀਜ਼ ਨਹੀਂ। ਝਗੜੇ ਨਾਲ ਦੀ ਚੀਜ਼ੇ ਨਹੀਂ ਅੰਦਰ ਮਿਟੀ ਕਿਹਾ ਨਾ ਸੇ ਹੋ ਗਈ ਰਾੜ ਉਹਦੇ ਝਗੜਾ ਨਾ ਸੇ ਹੋ ਗਿਆ। ਮਿਟੀ ਕਰਤ ਸਾਖਤ ਗਵਾਰਾ ਝਗੜਾ ਕਰਦੇ ਕੌਣ ਨੇ? ਜਿਹੜਾ ਸਾਖਤ ਵੀ ਗਵਾਲ ਪਸ਼ੂ ਦੇ ਗਿਆਨ ਕਹਿੰਦੇ ਗਿਆਨ ਤੋਂ ਸਖੜੇ ਪਸ਼ੂ ਕਰਦੇ ਨੇ ਕਰਦੇ ਹੁੰਦੇ ਆਮ ਬੁੱਧ ਹੈ ਕਿ ਆਮ ਦਾ ਕੰਮ ਹੈ ੜੜ ਕਰਨਾ ਬੈਠੇ ਲੱਗੇ ਰਹਿਣਾ ਐਵੇਂ ਹੀ ਹੈ ਨਹੀਂ ਹੋਈ ਗੀ ਗੁਰਮੁਖੀ ੜੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਆਹ ੜਾੜਾ ਗੁਰਮੁਖੀ ੜਾੜ ਮਟਾਈ ਗੁਰਮੁਖਾਂ ਨੇ ਤਾਂ ਆਪਣੀ ੜਾੜ ਮਟਾ ਲਈ ਬਦਰੋ ਜਿਉਂ ਕਮਾਹੇ ਨਾਨਕ ਨੂੰ ਸਮਝ ਕਰਨਾ ਬੰਦ ਕਰਤਾ ਗੁਰੂ ਨਾਲ ਨਾਲ ਵੀ ਠੀਕ ਹੈ ਜੀ ਇੱਥੇ 47ਵੀਂ ਪੌੜੀ ਦੇ ਉਪਦੇਸ਼ ਦੀ ਸਮਾਪਤੀ ਹੈ ਜੀ ਰੜੇ ਅੱਖਰ ਦਾ ਉਪਦੇਸ਼ ਇਹੀ ਹੈ ਗੁਰੂਾਨੰਕ ਸਾਹਿਬ ਨੇ ਵੀ ਕਿਹਾ ਹੈ ਕਿ ਅੰਦਰ ਜਿਹੜੀ ਦੁਬਿਧਾ ਚੱਲ ਰਹੀ ਹੈ ਉਹ ਤਾਂ ਹੈ ਕਿਉਂਕਿ ਰੜਾ ਰੜ ਮਿਟੇ ਸੰਗੀ ਸਾਧੂ ਜੇ ਸਾਧੂ ਦੇ ਨਾਲ ਮਿਲਾਪ ਹੋ ਜਵੇ ਫਿਰ ਉਹ ਸਾਰੀ ਰੜ ਜਾਂਦੀ ਹੈ ਮਨ ਮਾਇਆ 'ਚ ਜਿਹੜਾ ਜੁੜਿਆ ਹੋਇਆ ਹੈ ਕਰਕੇ ਹੀ ਦੁਨੀਆ 'ਚ ਲੜਾਈ ਪਈ ਹੋਈ ਬਿਲਕੁਲ ਜੇ ਮਨ ਆਪਣੇ ਸਾਧੂ ਦਾ ਸੰਗ ਕਰ ਲਵੇ ਫਿਰ ਸਾਰੀ ਦੁਨੀਆ ਵਿੱਚੋਂ ੜਾੜ ਖਤਮ ਹੋ ਜਾਏਗੀ ਹਾਂ ਜੀ ਬਿਲਕੁਲ ਤੇ ੜਾੜ ਅੱਖਰ ਚਰਵੇਦਾਾਂ ਚ ਖਾਸ ਕਰ ਵਰਤਿਆ ਹੋਏਗਾ ਉਸ ਕਰਕੇ ਹੀ ਇੱਥੇ ਹਿੰਦੀ ਵਿੱਚ ੜਾੜ ਅੱਖਰ ਨਹੀਂ ਹੈ ਵੈਸੇ ਕੋਈ ਉਹ ਆਈ ਦੇ ਹੈ ਤੇ ਇੱਕ ਵਿਲਖਣਤਾ ਗੁਰਮਤਿ ਦੀ ਅਸੀਂ ੜਾੜ ਅੱਖਰ ਵੇਦਾਂ ਦੇ ਉਹਦੇ ਚ ਇਹ ਗੱਲ ਨੂੰ ਸਿੱਧ ਕਰਨ ਨੂੰ ਕਿ ਗੁਰਬਾਣੀ ਚੋ ਬਾਣੀ ਤੋਂ ਹੀ ਆਈ ਹੈ ਇਹ ਲੜੇ ਅੱਖਰ ਦਾ ਸ਼ਾਇਦ ਇੱਥੇ ਇਸਤੇਮਾਲ ਹੋਇਆ ਹੋਇਆ। ਹਾਂ ਜੀ ਹਾਂ। ਹੋ ਗਈ ਜੀ ਅੱਜ ਅਖੀਰੀ ਦਿਨ ਹੈ ਕੈਲੰਡਰ ਹੈ ਜੀ ਗੋਰੀਆ ਦਾ ਨਵਾਂ ਸਾਲ ਦਾ ਤੇ ਆਪਾਂ 22 ਬਾਰ ਇਸ ਸਾਲ ਚ 22 12 ਤੇ ਇੱਕਾ ਗੁਰਮਤ ਕੈਲੰਡਰੀ ਸਮਾਪਤੀ ਕਰਤੀ ਹੈ। ਫਲ ਤੋਂ ਨਵੇਂ ਸਾਲ ਦਾ ਜਿਹੜਾ ਪਹਿਲਾ ਦਿਨ ਹੋਊਗਾ ਆਪਾਂ ਰਾਗਾਂ ਤੋਂ ਬਾਹਰ ਦੀ ਬਾਣੀ ਸ਼ੁਰੂ ਕਰਾਂਗੇ ਜੀ ਕਜੈਬੰਤੀ ਰਾਗ ਤੋਂ ਬਾਅਦ ਸanskritī ਸ਼ਲੋਕ ਸ਼ੁਰੂ ਹੁੰਦੇ ਆ ਜੀ ਸanskritī ਸ਼ਲੋਕਾਂ ਤੋਂ ਲੈ ਕੇ ਆਪਾਂ ਇੱਕ ਤਾਂ ਆਪਾਂ ਨੂੰ ਪੜ੍ਹਨ ਦੀ ਸਰਲਤਾ ਹੋ ਜਾਏਗੀ ਹਾਂ ਹਾਂ ਕਿਉਂਕਿ ਇਹ ਆਪਣੀ ਭਾਸ਼ਾ ਹੈ ਨਹੀਂ ਤੇ ਪੰਜਾਬੀ ਲੋਕਾਂ ਨੂੰ ਸੰਸਕ੍ਰਿਤ ਪੜ੍ਹਨੀ ਜੋ ਹੈ ਉਹਦੇ ਨੇੜੇ ਤੇੜੇ ਦਾ ਉਚਾਰਨ ਦਾ ਇੰਨਾ ਜ਼ਿਆਦਾ ਬੋਧ ਨਹੀਂ ਹੈ ਠੀਕ ਹੈ